ਉਹ ਲੱਗ ਦੁਸ਼ਮਨ ਨੂੰ ਨਾ ਜਾਵੇ ਇਹ ਰੋਗ ਕਪੜਾ ਕਪੜਾ ਕਦ ਵੀ ਰੱਬ ਦੇ ਹੌਪਯੰਗਮ ਮਨ ਬਸ ਸਾਡੇ ਵੱਡੇ ਮਹਾਪੁਰਸ਼ ਬਾਬਾ ਜੂਨ ਸਿੰਘ ਜੀ ਵਰਗੇ ਜਿਹੜੇ ਬੋਧ ਸਤਿਗੁਰੂ ਰਾਮ ਸਿੰਘ ਜੀ ਪੈਦਾ ਕੀਤੇ ਹੈ ਪਹੁੰਚ ਜਾਂਦੀ ਹੈ ਨਾਮ ਜਪਣ ਵਾਲੇ ਨੇ ਕਬੀਰਾਂ ਦਾ ਮੇਰੇ ਕੋਲੋਂ ਪੁੱਛੋ ਮੇਰੇ ਕਬੀਰ ਵਿਰਹੋਂ ਭਜੰਗਮ ਜਿਹੜਾ ਵਿਰਹੋਂ ਵਿਛੋੜਾ ਨਾ ਇਹ ਸੱਪ ਬਣ ਕੇ ਭਜੰਗਮ ਬਣ ਕੇ ਤੇ ਮੇਰੇ ਮਨ ਤੇ ਬਹਿ ਗਿਆ ਬڑے ਮੰਤਰੀ ਲਿਉਂਦੇ ਨੇ ਆਪਣਾ ਮੰਤਰ ਪੜ੍ਹਦੇ ਆ ਕੋਈ ਮੰਤਰ ਨਹੀਂ ਮੰਨਦਾ ਮੰਤਨਾ ਮੰਨੇ ਕੋਈ ਰਾਮ ਬਿਜੋਗੀ ਨਾਚ ਗਏ ਉਹ ਜੀਤਾ ਬੋਰਾ ਹੋਵੇ ਤਦ ਤੁਸੀਂ ਸਾਰੇ ਮਹਾਂਪੁਰਖ ਸਾਧ ਸੰਗਤ ਸਾਹਿਬ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਪੜ ਰਹੇ ਜੋ ਤੁਸੀਂ ਇਕੱਠੇ ਹੋਏ ਜੋ ਇੱਕ ਵਾਰ ਸਾਹਿਬ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਸ਼ਾਮ ਦਸਤਾਨੇ ਦਵਾਨੇ ਕੂਕਾ ਮਾਰ ਰਹੇ ਬਾਬੇ ਜੈਮਲ ਸੁਹਣੀ ਮੰਗੇ ਆਲੇ ਬੈਠੇ बैठे बैठे मस्ताने हो गए। ਤੇਰੇ ਬਾਹਰ ਜਿਆਦਾ ਸੋਦਾ ਆਈ ਤੇਰੇ ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜ ਦੇ ਚਰਨਾ ਜਾਂਦਿਆ ਗਰੀਬਨ ਆ ਜੀ ਜੋ ਕੁਝ ਮੈਨੂੰ ਸਤਿਗੁਰੂ ਆਖਿਆ ਮੈਂ ਨਹੀਂ ਆਪ ਤੇ ਨਹੀਂ ਕਰ ਸਤਿਗੁਰੂ RAM ਸਿੰਘ ਜੀ ਦੇ ਵਿయోగ ਵਿੱਚ ਪੜਦਾ ਹੀ ਸ਼ਬਦ ਸਭ ਚੁੱਪ ਕਰ ਗਏ ਸੱਚੇ ਪੁੱਛਿਆ ਬਾਬੇ ਨੂੰ ਦੱਸੋ ਤਾਂ ਨਹੀਂ ਤੁਹਾਨੂੰ ਕੋਈ ਸੁਝਾਅ ਦੋ ਵਿੱਚ ਸਾਰੇ ਮਗਨ ਹੋ ਗਏ ਸੋ ਸਤਿਗੁਰੂ RAM ਸਿੰਘ ਮਹਾਰਾਜ ਆਏ ਸੀ ਮੈਨੂੰ ਆਂਦਾ ਹੀ ਜਿਨ੍ਹਾਂ ਦੇ ਬੱਚੇ ਜਦੋਂ ਸਿੱਧੇ ਰਾਹ ਦੇ ਚੱਲ ਕੇ ਬਹੁਤ ਚੰਗੀ ਕਮਾਈ ਕਰਦੇ ਆ ਉਦੋਂ ਮਾਪੇ ਫੁੱਲੇ ਨਹੀਂ ਸਮਾਉਂਦੇ ਉਨੇ-ਉਨੇ ਮੈਨੂੰ ਆ ਕੇ ਗਏ ਆ ਸਾਡੇ ਵੱਡੇ ਜਿਓ ਇਤਨਾ ਸਬਦ ਪੜ੍ਹਦੇ ਤੇ ਫਿਰ ਸਤਿਗੁਰੂ ਰਾਮ ਸਿੰਘ ਮਹਾਰਾਜ ਬਾਬੇ ਜੈਮ ਸਿੰਘ ਨੇ ਆਖਿਆ ਮੈਂ ਅੱਗੋਂ ਨਹੀਂ ਕਰ ਸਕਦਾ ਮੈਨੂੰ ਇੰਨੀ ਮੇਰੇ ਕੰਨ 'ਚ ਪਈ ਆ ਗਰੀਬ ਨੂੰ ਆਪਦਾ ਨਾਂ ਲੈ ਕੇ ਆਂਦੇ ਸੀ ਸਾਥੀ ਦੇਣ ਵਾਲੇ ਗਰੀਬ ਆਵਾਜ਼ ਮੈਂ ਸਤਿਗੁਰਾਂ ਦੀ ਰਸਨਾ ਤੋਂ ਕਰੇ ਸਤਿਗੁਰੂ ਰਾਮ ਸਿੰਘ ਬਾਬੇ ਜੂਨ ਸੁਣੀ ਐਸੇ ਦਿਨ ਤੁਮ ਕੁਝ ਤੇ ਜਦੋਂ ਮੈਂ ਸਤਿਗੁਰਾਂ ਨੂੰ ਯਾਦ ਕੀਤਾ ਸੱਚੇ ਬਾਦਸ਼ਾਹ ਜੀ ਆਏ ਹਨ ਫਿਰ ਵੇਖ ਕੇ ਰੋਈ ਜਾਣ ਆਂਦਿਆ ਮੈਂ ਕਿਨੂੰ ਆਖਾਂ ਕਿਨੂੰ ਵੇਖ ਕੇ ਜੀਏ ਤੇਰੇ ਤੋਂ ਬਣਾ ਹੋਰ ਖਾਇੇ ਨਹੀਂ ਕੋਈ ਸਾਡਾ